ਉਸਤੇ ਮਨ ਮੈਂ ਕਰਨ ਕਰ ਕਰਮਨ ਮੇਰੇ ਸਤਿਵਿਵਹਾਰ ਉਸਤੇ ਮਨ ਮੈਂ ਕਰਨ ਕਰ ਉਸਤੇ ਜਿਹੜੀ ਗੱਡੀ ਹੈ ਉਹ ਬੰਦ ਕਰਨੀ ਹੈ ਬੋਲ ਕੇ ਜਿੱਕੇ ਸੋ ਪਹਿਲੀ ਗੱਲ ਉਸਤੇ ਮਨ ਮੈਂ ਕਰਨ ਕਰ ਰੌਲਾ ਪਾਉਣ ਦੀ ਲੋੜ ਨਹੀਂ ਪਾਣੀ ਵਿੱਚ ਹੀ ਪੰਡ ਦੀ ਲੋੜ ਨਹੀਂ ਬੰਦ ਕਰ ਦਿਓ ਕੋਈ ਜ਼ਰੂਰੀ ਨਹੀਂ ਬਾਣੀਓ ਪੜਨੀ ਉਸਤੇ ਕਰਨੀ ਇਹ ਕਿੰਦਾ ਸੱਜਣਾ ਕੀ ਬਣਾਇਆ ਕਿਵੇਂ ਬਣਾਇਆ ਜਦ ਹੀ ਦਾ ਸਭ ਕੁਝ ਓਰੇ ਵਿੱਚ ਸਰੀਰ ਹੈ ਜੋੜਦਾ ਨਹੀਂ ਪਤਾ ਲੱਗਦਾ ਕਿੱਥੇ ਆਤਮਾ ਕਿੱਥੇ ਆਤਮਾ ਕਿੱਦਾਂ ਰਹਿ ਗਈ ਹੈ ਵੀ ਪਤਾ ਨਹੀਂ ਲੱਗਦਾ ਕਿੱਥੇ ਜੋੜ ਕੇ ਥੇ ਰੰਗ ਕੋਈ ਬਦਲ ਜਗਾ ਜਗਾ ਤੇ ਪਤਾ ਲੱਗਦਾ ਸੀ ਉਸ ਤੋਂ ਹੀ ਮੰਨ ਲਾ ਕੰਨਰ ਕਾਰ ਕਰਮਾਂ ਨੂੰ ਮੇਰੇ ਸਤਿਗੁਰ ਹਾਂ ਤੇ ਬੰਦੇਰੇ ਜਿਹੜਾ ਕਾ ਤੇ ਉਸਕਾਰ ਤੇ ਧਾਰੀ ਦੀ ਉਸ ਤੋਂ ਤਿਕਰਦੀ ਕਿਉਂਕਿ ਉਹ ਉਸ ਵੇਲੇ ਉਸਤਕ ਕੀਤੀ ਹੈ ਫੌਰ ਚੱਕ ਲੋ ਗੁਰ ਦੀ ਉਸ ਹੈ ਜੀ ਕਿਤੇ ਜਿਸੀ ਸੋ ਉਸ ਹੀ ਇਧਰ ਪੜ੍ਹ ਕੇ ਉਹ ਤੋਂ ਹੀ ਸਲਾਫ ਸੀ ਜਾਨੀ ਉਹਨਾਂ ਦੀ ਬੋਲੀ ਤਾਂ ਫਿਰ ਬੋਲੇ ਨੇ ਨਾ ਮਗਰਾਹ ਮਗਰਾਹ ਦੀ ਬੋਲੀ ਤਾਂ ਹੀ ਹੈ ਪਰਮਾਨ ਮੇਰੇ ਸਤਿ ਵਿਵਹਾਰ ਹਾਂ ਵੇਲੇ ਪਾਦ ਵਪਾਰ ਕਰ ਬਿਜ਼ਨਸ ਦਾਬ ਦਾ ਬਿਜ਼ਨਸ ਹਾਂ ਦਾ ਵਪਾਰ ਸਤ ਵਿਹਾਰ ਨਿਰਮਲ ਰਸਨਾ ਅਮਰਤ ਪੀਓ ਰਸਨਾ ਰਸਨਾ ਨਿਰਮਲ ਹੋਵੇ ਨਿਰਮਲ ਰਸਨਾ ਕਾਕੇ ਤਾਂ ਅਵਰਤੀ ਚਲ ਗੁਰਮਣੀ ਨੂੰ ਵਿਚਾਰਨਾ ਪਹਿਲਾ ਮਨੁੱਖੀ ਜੋ ਲਿੰਤਾ ਦੂਰ ਕਰੋ ਪੱਖਪਾਤ ਦੂਰ ਕਰੋ ਪੱਖਪਾਤ ਦੇ ਹਿਸਾਬ ਨਾਲ ਅਰਥ ਨਹੀਂ ਕਰਦੇ ਅਸੀਂ ਪਿੱਛੇ ਕੀ ਸੁਣਿਆ ਕੀ ਨਹੀਂ ਸੁਣਿਆ ਕੋਈ ਸਾਨੂੰ ਸਾਡਾ ਲਿਆਜੀ ਇਹ ਗੱਲ ਕਹਿੰਦਾ ਕਿ ਜਿਹੜੇ ਅੱਜ ਕਰਦੇ ਨੇ ಪಕ್ಷਪਾਤ ਨਹੀਂ ਜੇ ਤੁਸੀਂ ਉਬਰਤ ਲੰਗੇ ਉਬਰਤ ਨੂੰ ਤਾਂ ਜੂਟਣ گے ਤੇ ਬਚੇ ਆ ਜੂਗਾ ਉਸ ਬਾਅਦ ਕੀ ਹੂ ਸਾਡੇ ਦਾ ਤਾਂ ਕੋਈ ਇੱਦਾਂ ਉਹ ਜੈਨ ਨੇ ਕੋਈ ਜੈਨ ਅਧਿਐਸ ਜੈਨ ਅਸੀਂ ਠੀਕ ਆ ਅਸੀਂ ਕਹਿੰਦੇ ਅਸੀਂ ਠੀਕ ਆ ਉਥੇ ಪಕ್ಷਪਾਤ ਆ ਜਾਏ ਉਹ ਆਪਣੇ ਹਿਸਾਬ ਨਾਲ ਗੁਰਬਾਨੀ ਦੀ ਅਰਥ ਕਰਦੇ ਨੇ ਆਪਣੇ ਨਜ਼ਰ ਨਾਲ ਆਪਣੇ ਨਾਲ ਕਰਦੇ ਨੇ ਆਪਾਂ ਆਪਣੇ ਨਾਲ ਨਿਕਲਦੇ ਆਪਾਂ ਗੁਰਬਾਨੀ ਨੂੰ ਗੁਰਬਾਨੀ ਦੇ ਜਿਹੜੇ ਦਾਸ ਬੰਦੇ ਨੇ ਬਦੋ ਦੇਦੇ ਜਿਹੜੇ ਆਸ ਬੰਦੇ ਨੇ ਅਸੀਂ ਤੋਂ ਦੇਦੇ ਇਹ ਗੱਲ ਨਹੀਂ ਹੈ ਉਹ ਆਪਣੇ ਹਿਸਾਬਲੇ ਬਣਾਉਂਦੇ ਤੇ ਜਿੰਨਾ ਚਿਰ ਤੁਸੀਂ ਪੱਖਪਾਤ ਰੱਖ ਕੇ ਨੂੰ ਅਰਥਾਉਂਗੇ ਆ ਅਰਥ ਨਹੀਂ ਕੀ ਸਕੋਗੇ ਜਿਨਾ ਚੇ ਜੇਵਨ ਸ੍ਰੀ ਚੰਦ ਨੂੰ ਤੇ ਆਦਰ ਰੱਖ ਕੇ ਸ੍ਰੀ ਚੰਦ ਦੇ ਉੱਭਣ ਕੇ ਗੁਰੂ ਕੋਈ ਗੁਰਬਾਣੀ ਪੜੂਗਾ ਉਹ ਇਹ ਅਸਲੀ ਬਲ ਸਕਦਾ ਇਹ ਲੇ ਫਗਰਦੇ ਕੋਈ ਨਹੀਂ برداشت ਕਰੂਗਾ ਇਹਨਾਂ ਕੋਲ ਕੁਛ ਨਹੀਂ ਸੀਗਾ ਸਾਧਗਨਾਂ ਨੂੰ ਜਿਹੜਾ ਸਰਦਾਰ ਜੀ ਨਾਨਕ ਨੇ ਲੈਣ ਨੂੰ ਗੁੜਾਈ ਜੀ ਦਿੱਤੀ ਇਹ ਨਹੀਂ ਕੀਤਾ ਉਹ ਨਹੀਂ ਗੱਲ ਆਉਣਾ ਦੇ ਹਜੂਰੀ ਕੋਈ ਮੰਦੇ ਨਾ ਕੋਈ ਜੇ ਹੋਈ ਨਾ ਉਹਨਾਂ ਕੋਲ ਸੱਚ ਹੁੰਨੀ ਹੁੰਦੀ ਕਿ ਇਹਨਾਂ ਨੂੰ ਨਿਵਲਦੇ ਸੱਚ ਤੇ ਬੁੱਧ ਕਰਨਾ ਇਹ ਕਰਕੇ ਜੇ ਤੁਸੀਂ ਸੱਚ ਦਾ ਵਿਹਾਰ ਕਰ ਰਹੇ ਕਰਮਾਂ ਦੇ ਸੱਚਾ ਵਿਹਾਰ ਕਰ ਰਹੇ ਤਾਂ ਤੁ ਇਹਦੇ ਚ ਸੱਚ ਪਹਿਲਾਂ ਆਪ ਰੜਕਣਾ ਪਊ ਅਮਰਤ ਪੀਓ ਕੋਪਰਸ ਪੀ ਕੇ ਤਾਹ ਸਹਿਲਾ ਕਰ ਲੈ ਜਿਓ ਪਹਿਲਾਂ ਤੁਸੀਂ ਆਪਣੇ ਜੀ ਰੂਹ ਸਦਾ ਤੇ ਸਹਿਲਾ ਕਰ ਲੋ ਪਹਿਲੇ ਬਣ ਪਰ ਉਹ ਤੋਂ ਪ੍ਰਥਮੇ ਮਨ ਪਰ ਬੋਧਾ ਆਪਣਾ ਮਸ਼ਾਅੱਲਾ ਜੇ ਆਪਣੀ ਤਸੱਲੀ ਕਰ ਲੋ ਰੱਜ ਲੋ ਨੰਦ ਹੋ ਰੂ ਫਿਰ ਦੂਜੇ ਨੂੰ ਬੁਲਾਇਓ ਹਾਂਜੀ ਨੈਣੋਂ ਪੇਖੋ ਠਾਕੁਰ ਜਿਹੜੀ ਤੱਦਲੀ ਅੱਖ ਹੈ ਉਹਦੇ ਨਾਲ ਠਾਕੁਰ ਵੀ ਅੰਦਰ ਆ ਗਏ ਕਰਵੇਂ ਠਾਕੁਰ ਨਦਰ ਨਾ ਆਵੇ ठाकुर का ये रंग है ठाकुर की है ठाकुर ब्रह्म ज्ञान ब्रह्म ज्ञानी ब्रह्म ज्ञान का जो तत् ज्ञान का रंग है वो देखो वो देखन की गलती ना करजेओ ऐनो भेद ठाकुर का रंग अत्तलिया करना तू ही देखो कोई जो सच्चा है असली काढ ले समझ ले कुर्बान के ਸੱਚ ਬੋਲੋ ਸੁਪਨੇ ਤੇ ਰਹਿ ਗਿਆ ਇਹ ਰਾਹਿਆ ਦਾ ਰੰਗ ਸਹੀ ਨਹੀਂ ਹੈ ਜੇ ਸਾਨੂੰ ਸਾਡੇ ਅਰਥਾਂ ਤੇ ਸ਼ੱਕ ਹੈ ਤਾਂ ਰੰਗ ਦਾ ਜੋ ਸਹੀ ਨਹੀਂ ਦੇਖਿਆ ਸੱਚ ਦਾ ਰੰਗ ਦੇਖੋ ਜਾਂ ਸੱਚ ਦੇ ਰੰਗ ਦਾ ਅਰੰਭ ਮਿਲ ਜਾਏ ਠੇ ਸਾਡੇ ਅਰਥ ਕੀ ਬਣੇ ਹੋ ਸੰਗ ਬਿਨ ਸੰਗ ਸਾਦ ਸੰਗੀ ਇੱਕ ਸਮਝ ਸੰਗੀ ਸਾਦ ਸੰਗੀ ਜਿੰਸ ਸਭ ਸੰਗ ਜੇ ਆਪਣਾ ਮਨ ਸਾਧ ਲੋ ਤੁਸੀਂ ਜੇ ਨੇ ਆਪਣਾ ਮਨ ਸਾਧ ਲਿਆ ਆਪਣਾ ਮਨ ਸਾਧੋ ਜਿੰਸ ਸਭ ਸੰਗ ਆ ਜਿਹੜੀ ਸੰਪਤੀ ਹੈ ਸਰੀ ਤੁਹਾਡੀ ਝੂਟ ਦੀ ਕਿਸੇ ਕਿਸਮ ਦੀ ਸੰਪਤੀ ਨਹੀਂ ਹੈ ਜੀ ਜੇ ਮਨ ਆਪਣਾ ਮੂਰਨਾ ਕਿ ਸਾਇੰਸ ਆਬੂ ਸੰਗੋ ਹਰ ਕਿਸਮ ਦਾ ਸੰਤ ਜਿਹੜਾ ਇਹਦਾ ਵਹਾਰਾ ਕਿਸੇ ਕਿਸਮ ਦਾ ਇਤਿਨਾਛਣ ਹੈ ਕੋਈ ਤਾਂ ਛੱਡੀਆਂ ਫਿਰ ਤੁਬ ਸਭ ਜੋੜ ਅਬ ਸਭ ਸੰਤ ਤੋੜੀ ਹੁਸੂਆ ਜਿੱਦਣ ਬਣ ਸਕਿਆ ਹੋਰ ਚਰਨ ਚਲੋ ਮਾਰਗ ਗੋਬਿੰਦ ਮਟੇ ਪਾਪ ਔਰ ਜਪੀਏ ਹਰ ਗੋਬਿੰਦ ਚਰਣੀ ਚਲੋ ਬਾਹਰ ਗੋਬਿੰਦ ਫਿਰ ਗੋਬਿੰਦ ਦੇ ਮਾਰਗ ਤੇ ਤੁਰੋ ਉਹ ਤਾਂ ਪੈਰ ਤੋਂ ਜ਼ੀਰੋ ਹੋ ਗਏ। ਜੀ ਆ ਚਰਨ ਚੋਂ ਮਾਰਗ ਕੋ ਬੰਦੋ। ਤੂੰ ਸਭ ਜੋੜਿਆ ਪਰ ਸਭ ਤੋੜੀ ਹੈ ਜੇ। ਫੇਰ ਸਾਧੂ ਕੋ ਮਿਲਣਾ। ਸੰਤ ਰੰਮੀ ਜਿਹਾ ਕੋਈ। ਆ ਪਾਛੇ ਪਾਉਣਾ ਦੀਵਾ ਬਹਿੋ ਜੋ। ਤੇ ਇਹ ਨਾਪ ਨਹੀਂ ਤਾਂ ਜਾਏ ਦੀ ਜਗ੍ਹਾ ਨਹੀਂ ਚੱਲ ਨਹੀਂ ਚੱਲ ਕੇ ਚੱਲੇ ਨਹੀਂ ਸਕਦਾ। ਮਾਰਗੋ ਉਹਦੇ ਬਾਅਦ ਚਰਨ ਚਲੋ ਮਾਰਗੋ ਚਤਰ ਮਨ ਫਿਰ ਅੱਗੇ ਹੀ ਉਹਦੀ ਜਾਓ ਫਿਰ ਪਿਛੇ ਮੁੜ ਕੇ ਨਾ ਦੇਖੋ ਪਾਪ ਸਾਗਰ ਤੋਂ ਹੀ ਚਲਣਾ ਉਧਰ ਨੂੰ ਮਾਰਗੋ ਕਿਸਦੇ ਪਾਪ ਸਾਗਰ ਪਾਰ ਕਰ ਲੈ ਮਾਰਗੋ ਹੋਰ ਕੁਝ ਨਹੀਂ ਹੈ ਸਾਗਰ ਤੋਂ ਪਰੇ ਗੋਬਿੰਦੂ ਪਾਪ ਸਾਗਰ ਪਾਰ ਕਰ ਰਹੀ ਹੈ ਮਾਰਗੋ ਕਿਹ ਕਿਹਰ ਗਈ ਹੈ ਮਾਰਗੋ ਗੋਬਿੰਦ ਕੀ ਵੇ ਪਾਪ ਸਾਗਰ ਨੂੰ ਪਾਰ ਕਰਦੇ ਆਗਿਆ ਕਰ ਪਾਰੂ ਗਏ ਕੋਈ ਉੱਠ ਆ ਗਿਆ ਆਗਿਆ ਕਰ ਰਹੀ ਗੋਬਿੰਦ ਮਾਰਗ ਅਧਰ ਆਇਆਲੀ ਪਹਿਰ ਦਾ ਨਾਮ ਨਾਮ ਗੋਬਿੰਦ ਮਾਰਗ ਬਣਾ ਤਰਨ ਕਹਾਂ ਦੱਸੇ ਗੋਬਿੰਦ ਮਾਰ ਕੀ ਹੁੰਦਾ ਉਹ ਗੋਬਿੰਦ ਮਾਰ ਰਖਦੇ ਆ ਗੋਬਿੰਦ ਮਾਰ ਸਾਡੇ ਸੀਗਾ ਗੁਰਬਾਣੀ ਚ ਵੇਰਾ ਬਲੇ ਖਾਪੂ ਸੋ ਹੁਣ ਇਹ ਆ ਪੜ੍ਹ ਕੇ ਗੋਵਿੰਦ ਮਾਰੂ ਨੂੰ ਜਾਇਆ ਕਰਨ ਕੇ ਆ ਜਿਹੜਾ ਕੋ ਲਿਖਿਆ ਸਭ ਦਾ ਸਤਾਰਾ ਸੋ। ਤੁਹਾਨੂੰ ਕਹਿੰਦਾ ਜਨਮ ਨਹੀਂ ਹੋਇਆ ਅਜੇ। ਇਹ ਦੇ ਕਲਾਕਾਰੀਆਂ ਨੇ। ਜਿਹੜੇ ਵੀਣੇ ਨੇ ਨਾ ਵੀਣੇ ਪੁਰਾਣੀਆਂ ਕਲਾਕਾਰੀਆਂ ਨੇ ਗੋਵਿੰਦ ਮਾਰੂ ਉਹਨਾਂ ਦੀ ਜੋ ਬਣਾ ਰਹੀ ਸੀ ਨਵੇਂ ਨਵੇਂ ਸਤ ਸ੍ਰੀ ਅਕਾਲ ਕਰਤਾ ਜੀ ਇਹ ਉਹਨੇ ਆ ਗਏ ਦਿਮਾਗ ਦੀ ਕੱਢਣਾ ਜਾਂ ਤੇ ਜੀਰੋ ਆਈ ਜੀ ਆ ਕਾਣਾ ਗੁੱਟਾ ਜਗਾ ਫਸਿਆ ਬਿਜਾ ਰੋ ਉਹਦੇ ਆਪਨ ਅਕਾਲ ਦਾ ਜਿਹੜਾ ਉਲਟਾ ਹੋਣ ਦਾ ਦੋ ਦੋਸੀ ਬਣਦਾ ਬੇਮਤਲਬੀ ਦੋਸੀ ਬਣਦਾ ਕਹੇ ਕੀ ਨਾ ਦਾ ਪੰਗਿਆ ਤੇ ਦੂਰੇ ਦਾ ਔਰ ਇਹਦੀ ਬੁੱਧ ਹੈ ਸਿੱਖੀ ਦਾ ਗਿਆਨ ਹੈ ਸਿੱਖੀ ਦਾ ਗਿਆਨ ਕਿੱਥੇ ਨੂੰ ਲੱਭੋ ਸਾਥ ਸਾਧ ਸੰਗਤ ਸਾਧ ਅਤਾਰ ਸਿੱਖੀ ਇਕੱਠੀ ਕਰਕੇ ਕਿਨ ਕਲੇ ਆ ਨਿਕਲੇ ਉਹ ਜਦ ਕਰ ਗੋਵਿੰਦ ਮਾਰਗ ਬਣਾਇਆ ਗਿਆਨੀ ਚਾਲ ਸਮ ਰਾਸ਼ਟਰਪਤੀ ਹੈ ਉਹਦੀ ਫੌਜ ਹੈ ਤੇ ਤਬਲਾ ਕਰ ਤੇ ਉਹਦਾ ਹੀ ਵੱਡਾ ਛੜਿਆ ਹੋਇਆ ਆਪੇ ਪੜਿਆ ਹੋਇਆ ਉੱਥੇ ਬਿਠਾ ਲਿਆ ਆਪੇ ਬੰਦਾ ਬਿਠਾ ਲਿਆ ਉਹਦੀ ਫੌਜ ਜਾਂਦੀ ਹੈ ਹੋਰ ਗੱਲ ਨੂੰ ਵਾਸਤੇ ਹੋਰ ਗੱਲ ਨੂੰ ਫਿਰ ਅਕਲ ਆਣਾ ਪਛਤਾਉਂਦਾ ਗਲਤੀ ਹੋਈ ਅੰਦਰੋਂ ਤਾਂ ਚਾਹੁੰਦਾ ਹੋਵੇ ਪਰ ਹੋ ਵੀ ਕੀਤਾ ਸੀ ਕੋਈ ਬੰਨ ਗਿਆ ਕੋਈ ਹਾਂ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪੀਏ ਪਾਪ ਜਪੀਏ ਹਰ ਪਾਪ ਜਿਹੜੇ ਨੇ ਜੋ ਵਿਰੋਧ ਹੈ ਪਾਪ ਹੈ ਸਭ ਤੋਂ ਵੱਡਾ ਪਾਪ ਇਹ ਹੁਕਮ ਦਾ ਵਿਰੋਧ ਹੈ ਇਹ ਮਿਟ ਜਾਂਦਾ ਨਹੀਂ ਕਰਦਾ ਪਾਣੀ ਦੇ ਖਾਬ ਨਹੀਂ ਹੁੰਦਾ ਮਿਟੇ ਪਾਪ ਜਪੀਏ ਹਰਬਿੰਦ ਜੇ ਹਰ ਜਿਹੜਾ ਹੈਗਾ ਗੋਬਿੰਦ ਹਰਿ ਜਿਹੜਾ ਹੈ ਉਹਨੂੰ ਜਪ ਲਈਏ ਤੂੰ ਆ ਸਾਡਾ ਇਹ ਜਪੀਏ ਹਰ ਬਿੱਦ ਇੱਕ ਇੱਕ ਘੜੀ ਆਧੀ ਘੜੀ ਇੱਕ ਬਿੱਤ ਵੀ ਇੱਕ ਘੜੀ ਵੀ ਜੇ ਤੂੰ ਜਪ ਲਈਏ ਉਹਨਾਂ ਚਿਰ ਪਾਪ ਘਟਿਆ ਜਾਂਦਾ ਜਿੰਨਾ ਚਿਰ ਉਹਨੂੰ ਜਪੋਂਗੇ ਉਹਨਾਂ ਚਿਰ ਪਾਪ ਉਹਨਾਂ ਚਿਰ ਪਾਪ ਜਾਂਦਾ ਜੇ ਤੁਸੀਂ ਹਮੇਸ਼ਾ ਵਾਤੇ ਮਟਾਉਣਾ ਤਾਂ ਹਮੇਸ਼ਾ ਵਾਤੇ ਜਪ ਪੇ ਸਾਤ ਸਾਹ ਸਿਰੋ ਪੇ ਸਾਤ ਸਾਹ ਸਿਰੋ ਉਹ ਵਿੱਚ ਜਿੰਨਾ ਜਰ ਕੋ ਮੰਨ ਤੇ ਜਪਾਂਗੇ ਜਿੰਨੇ ਘੜੀ ਬਿੰਦੂ ਬਿੰਦੂ ਬਿੰਦੂ ਬਿੰਦੂ ਘੜੀ ਨੂੰ ਗਿਣਨ ਇਹ ਸਕਲ ਤੋਂ ਥੋੜਾ ਜਿਹਾ ਜ਼ਿਆਦਾ ਹੋਣਾ ਆਪਾਂ ਇਹ ਬਿੰਦੂ ਘਟਾਈ ਦੀ ਬੋਲੀ ਹੈ ਪੰਜ ਮਿੰਟ ਚਾਹ ਮੈਂ ਆਪਾਂ ਇਹ ਪੰਜ ਘੜੀ ਆਧੀ ਘੜੀ ਜੁਬੀ ਆਧੀ ਹੋ ਉਹ ਹੈ ਜਿੰਨਾ ਜਲ ਸਮੋ ਰੋਗੇ ਉਨਾ ਜਲ ਪਾਪ ਨਹੀਂ ਪਾਪ ਘਟੇਗਾ ਉਹ ਇਹਨੂੰ ਬਦਾਲੋ ਫਿਰ ਤੁਸੀਂ ਆਹ ਬਤਾਉਂ ਰਹੀ ਸੀ ਪ੍ਰਣਾਯਮ ਉਹ ਸਾਹ ਬਦਾਲ ਰਿਹਾ ਦੇ ਦੁਸਾਬ ਹੈ ਫਿਰ ਬਦਲ ਨਹੀਂ ਸਭ ਨਾਲ ਜੀ ਜੀ ਕਰ ਲੈ ਕਰ ਹਰ ਕਰਮ ਸ੍ਰਵਣ ਹਰ ਕਥਾ ਕਰ ਹਰ ਕਰਮ ਸ੍ਰਵਣ ਹਰ ਕਥਾ ਸ੍ਰਵਣ ਹਰ ਕਥਾ ਜਿਹੜੇ ਕਰਨੇ ਇਹ ਤਰ ਮਰ ਦੋ ਕਰਮ ਇਹ ਕਰਮ ਕੀ ਕਰਨ ਇਹ ਨਾ ਕਰਦੀ ਕਰੇ ਹਰ ਕਰਮ ਹਰ ਕਾ ਜੋ ਕਰਮ ਹੋ ਗਾ ਜੋ ਕਰਮ ਕਰਨ ਆਇਆ ਸੀ ਜੋ ਆ ਇਹ ਕਰਨ ਆਇਆ ਸੀਗਾ ਕੋਈ ਦੀ ਕਰਨਾ ਸੀ ਜੂੰਦਾ ਇਹ ਦੋਏ ਬਣ ਕੇ ਕਰਨ ਦੋਹੇ ਕਰ ਮਿਲ ਕੇ ਤਾਂ ਵਪਸਾਰ ਪਾਰ ਕਰਨਾ ਇਹ ਤਾਂ ਵਪਸਾਰ ਕਾਮ ਲੱਗਣ ਦੋ ਇਕੱਠੇ ਜਿਹੜਾ ਕਾਮਾ ਸੀ ਕੰਮ ਹੈ ਜੇ ਇਕੱਠ ਨਾਲ ਕੋਈ ਕਰੇ ਇਕੱਠ ਵਿਹਲਾ ਰੱਖੇ ਕਦੋਂ ਹੋਜੂ ਕਦੋਂ ਦੋ ਹੱਥਾਂ ਨਾਲ ਕਰਨ ਵਾਲਾ ਹੋਵੇ ਹੱਥ ਜੀ ਇਕੱਲਾ ਹੋ ਕਦੋਂ ਹੋਊਗਾ ਕਪੜਾ ਨਹੀਂ ਵਰਦੂ ਆ ਜਾਈਦਾ ਨਾ ਤਾਂ ਨਹੀਂ ਚੋ ਇਹ ਜੋ ਜਦ ਰਾਤ ਨੂੰ ਜੋੜਨੀ ਹੈ ਜੋ ਲੋਭ ਰਤ ਦੋ ਹੱਥ ਚ ਹਰ ਕਰਮ ਸਭਨ ਉਹਦੇ ਚ ਮਨ ਵੀ ਨਾਲ ਬਦਨ ਪਾਟਪਟਾਵੇ ਮਨੂ ਜੀ ਨਾ ਰਾਤ ਨੂੰ ਡੋਣ ਹਰ ਕਿਸ ਹਰ ਕਾ ਕਮਹਿੜਾ ਹਰ ਸਭ ਲੋਭਣਾ ਜਿਹੜਾ ਹਰਕਾਰ ਕੀ ਹਰਕਾਰ ਬਲੋਵ ਹੈ ਉਹ ਹਰ ਸ਼ਬਲੋਹਣਾ ਬਲੋਵੋ ਮੇਰੇ ਭਾਈ ਸਾਜੇ ਬਲੋਵ ਆ ਜਿਹੜੀ ਗੁਰਬਾਣੀ ਵਿਚਾਰਨੀ ਹੈ ਇਹ ਹਰਕਾਰ ਹੈ ਕੱਲਾ ਨਹੀਂ ਉਹਦਾ ਬੇਲਾ ਰਹਿਣਾ ਥਾਰਾ ਤੇ ਤੁਥੋਂ ਬੇਲ ਮਿਲਦਾ ਜੀ ਉਹ ਸਾਰਾ ਦਿਨ ਬੇਲਾ ਇਹਨੂੰ ਬੇਲ ਮਿਲਦਾ ਨਹੀਂ ਇਹ ਸਭ ਤਾਂ ਤਾਂ ਹੋ ਰਿਹਾ ਹੈ ਕਾ ਇਹਨੂੰ ਤਾਂ ਮਿਲਦਾ ਉਹ ਸਾਰਾ ਦਿਨ ਬੇਲਾ ਤਸਾਹਿਲ ਨੇ ਹੋ ਤਾਂ ਕੋਈ ਅੱਲਿ ਬਖਰੇ ਬੈ ਲਿਆ ਹੋ। ਇਸੀ ਜਨੂਬ ਸੁਬਨਾ ਸਾਰਾ ਦਾ ਤਾਈ ਜੀਂ ਨਹੀਂ ਲੱਗਦਾ ਸਾਡਾ। ਜੇ ਕਿਉਂ ਨਹੀਂ ਲੱਗਦਾ? ਤੋਂ ਕੰਮ। ਜੋ ਸਾ ਨੂੰ ਚਾਹੀਦਾ ਨਾ ਬੋਲੋ। ਅਸਲ ਵਿੱਚ ਉਹ ਬੈ ਜੀ ਤਾਂ ਬੈ ਲਿਆ। ਅਸਲੀ ਜੀ ਦਾ ਬੈ ਉਹਦਾ ਦੱਕਾ ਕਰਦਾ ਨਹੀਂ ਸਾਦਾ ਨਾ ਤਾਂ ਕਰੇ ਉਹ ਉਹ ਚਾਹੀਦਾ ਕਰੇ ਉਹ ਚਾਹੀਦਾ ਦਿਲ ਉਹ ਚਹੀਦਾ ਤਾਂ ਇਹ ਲਾ ਬਣੀ ਡੇ ਉਹ ਵੇਲਾ ਜੋ ਕੰਮ ਕਰਨਾ ਹੈ ਉਹ ਨਹੀਂ ਕਰ ਰਿਹਾ ਆ ਜਿਹੜਾ ਕੋ ਕਰਿਆ ਉਹਦਾ ਕੰਮ ਨਹੀਂ ਹੈ ਇਹ ਅਬਰਕਾਜ ਹੈ ਅਬਰਕਾਜ ਤਰ੍ਹਾਂ ਕਿ ਤਨਾ ਕੰਮ ਉਹ ਜਾਣਦਾ ਹੈ ਜੀ ਜਿਹੜਾ ਖੰਭ ਉਹਨੇ ਕੱਢਿਆ ਉਹ ਬਿੱਲਾ ਉਹ ਵਿਚਾਰ ਦਾ ਇੱਕ ਹਸਤਾਖਰ ਜਿਹੜੇ ਖੋਜੀ ਨੇ ਉਹਦਾ ਵੇਲਾ ਨਹੀਂ ਹੁੰਦਾ ਖੋਜਾਇਦਾ ਸਦੀ ਜੀ ਉਹਨਾਂ ਦਾ ਕੱਲਿਆਂ ਦਾ ਵੀ ਜਿਹੜਾ ਉਹ ਮਾਇਆ ਦੀ ਖੋਜੀ ਉਹ ਖੋਜੀ ਦਾ ਮਾਇਆ ਨਾਲ ਵੀ ਹੁੰਦਾ ਕੱਲਾ ਹੀ ਬੈਠਾ ਰੁੱਖਲਾ ਉੱਥਰ ਕੱਲਾ ਬੈਠੂ ਕੋਈ ਕੱਲਾ ਬੈਠੂ ਬੈਠੂ ਉੱਥੇ ਜਿੱਥੇ ਚਿੰਤਨ ਹੈ ਜਿੱਥੇ ਖੋਜ ਹੈ ਕਾਸ਼ ਜੀ ਕਾਸ਼ ਜੀ ਉੱਥੇ ਜੀ ਲੱਗਦਾ ਹੈ ਇਹ ਕੋੜਿਆ ਨਹੀਂ ਹੈ ਕਿਤੇ ਜੀ ਲੱਗੇ ਕਰੇ ਪਰ ਜੀ ਨੇ ਬਾਹਰ ਕੀ ਆਂ ਲੋਂਦੇ ਨੇ ਬਾਹਰ ਕਹਿੰਦੇ ਕਰਮੋਂ ਸ਼ਰਵਨਾ ਹਰ ਕਥਾ ਸੁਬਣੀ ਹਰ ਕਥਾ ਸਭਾ ਸਬਣਾ ਦੇ ਵਿਚਾਰ ਕੀ ਕਥਾ ਪਵੇ ਸੁਣੇ ਹਕੀਕਤ ਆ ਤੇ ਕਰ ਉਹਨੂੰ ਰੜਕਣ ਬੁਲਾਉਣ ਦੋਏ ਸੁਣ ਕੇ ਅੰਦਰ ਵਿਚਾਰ ਕਰਨਾ ਵਿਚਾਰ ਕਰਨਾ ਜੇ ਵਿਚਾਰ ਨਹੀਂ ਕੀਤੀ ਸੁਣਦਾ ਕੋਈ ਫਾਇਦਾ ਨਹੀਂ ਸੁਣਨਾ ਸਾਵਣ ਕਰਨਾ ਬੁੱਧੀ ਦੇ ਚਲਤੇ ਸੁਣੋ ਜਿਹੜਾ ਸਵਣ ਕਰਨਾ ਹੁੰਦਾ ਹੈ ਸਮਝ ਕੇ ਸੁਣਨਾ ਹੁੰਦਾ ਸੁਣ ਕੇ ਸਮਝਣਾ ਹੁੰਦਾ ਸਭ ਨੂੰ ਉਹ ਧਰਮ ਹੈ ਉਹ ਸਰਬ ਜਿਹੜਾ ਸੁਣ ਕੇ ਸਮਝ ਲਿਆ ਉਹ ਸਭਨ ਹੋ ਗਿਆ ਜਿਹੜਾ ਸਮਝਿਆ ਨਹੀਂ ਉਹ ਸਮਝ ਨਹੀਂ ਉਹਨਾਂ ਕੱਲਾ ਬੰਨੋਂ ਜਿਹੜਾ ਕੰਨ ਨਾਲ ਸੁਣ ਲਿਆ ਉਹ ਇਹਨੇ ਸੁਣ ਲਿਆ ਉਹਦਾ ਇੰਕੀ ਧਰਮ ਜਦੋਂ ਕੋ ਸੁਣੇ ਥੋੜੇ ਜਿਹਾ ਬਾਅਦ ਹਾਂ ਆਰ ਹੈ ਨਾਲਗ ਉਜਲ ਮੱਥਾ ਪਰ ਦਰਗਾਹ ਨਾਲਗ ਉਜਲ ਮੱਥਾ ਨਾ ਮੈਂ ਕਹਿੰਦਾ ਹਰ ਦਰਗਾਹ ਦੇ ਵਿੱਚ ਬੋਖੋ ਜਲ ਹੋ ਜਵੇ ਤਾਂ ਕਿ ਤਾਂ ਉਜਰ ਹੋਗਾ ਜੇ ਕਥਾ ਹਕੀਕਤ ਕਥਾ ਕੁਰਬਾਨੇ ਨੂੰ ਸੁਣਦਾਰ ਸਬਰ ਕਰੂ ਔਰ ਵਿਚਾਰੂ ਲਗਾਤਾਰ ਫੇਰ ਦਰਗਾਹ ਜੋ ਜਲ ਬਥਰਨਾ ਉਹਨਾਂ ਨੇ ਕੰਮ ਕੀਤਾ ਨਹੀਂ ਨਾ ਹੋਰ ਕਰਦੇ ਨੇ ਇਸ ਕਰਕੇ ਦਰਗਾਹ ਜੋ ਜਲ ਬਥਰਨਾ ਦਾ ਹੋ ਨਹੀਂ ਕੀ ਬਾਤ ਕਰ ਰਹੇ ਨੇ ਸਿਖਾਣੂ ਉਜਲ ਪਥਾ ਕਿਵੇਂ ਹੋਣਾ ਸੀ ਨਾਲ ਧਿਆਨ ਹੈ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਦਾ ਉਜਲ ਪਥਾ ਹੋਇਆ ਨਹੀਂ ਦਰਵਾਜ਼ਾ ਪਰ ਅੱਜ ਜਿਹੜਾ ਬਤੌਧਾਰ ਇਸ ਟੈਨਸ਼ਨ ਦੀ ਗੁਰਬਾਣੀ ਲਿਖ ਔਰ ਇਸ ਟੈਨਸ਼ਨ ਦੀ ਵਿਚਾਰਤਾ ਦਾ ਵਿਖਿਆਨ ਕਰ ਉਹਨਾਂ ਕੋਲ ਹੈ ਕੁਝ ਨਹੀਂ ਕੋਨਾ ਉਹ ਕੋਈ ਜਿਹੜਾ ਕੋਈ ਅੱਜ ਸੁਣਦੇ ਸੁਣ ਰਹੇ ਆ ਜਾ ਬਹੁਤ ਵਧੀਆ ਸੀ ਆਸਲੀਏ ਬਹੁਤ ਇਹਦੋਂ ਵੀ ਘਟੀਆ ਸੀ ਹੁਣ ਜੋ ਵਧੀਆ ਬਹੁਤ ਥਾਰਡ ਕਲਾਸ ਫੋਰਥ ਕਲਾਸ ਕਹਾਣੀਆਂ ਸੀ ਜਿਹੜੀ ਬਦਗਰਤੀਆਂ ਹੋਣਗੇ ਹੁਣ ਕੁਝ ਠੀਕ ਅੱਗੇ ਨਾਲ ਬਹੁਤ ਠੀਕ ਹੈ ਫਿਰ ਇਹਦੋਂ ਵੀ ਘਟੀਆ ਸੀ ਲੋਕਰ ਬੜੀ ਸੀ ਜਿਹੜੀ ਕਹਿ ਗਿਆ ਕਹਾਣੀਆਂ ਇਹ ਹੁੰਦੇ ਨਾਲ ਹੀ ਗੁਰਬਾਨੀ ਦਾ ਧਾਹੀ ਹੀ ਜੀ ਕੋਈ ਨਹੀਂ ਕਹਾਣੀਆਂ ਸਾਰੀਆਂ ਜੂਰ ਗੁਰਬਾਨੀ ਦਾ ਹੋਲਡਰ